ਸ਼ਲੋਕ ਮਹੱਲਾ ਤੀਜਾ ਬਾਬੀ ਹਾ ਗੁਣਵੰਤੀ ਮਹਿਲ ਪਾਇਆ ਔ ਦੂਰ ਅੰਤਰ ਤੇਰੇ ਹਰ ਵਸ ਹੈ ਕੀ ਸਦਾ ਹਜ਼ੂਰ ਬਾਬੀ ਜੀ ਇਹਨੂੰ ਸਤਿ ਕੀਤਾ ਇਹੋ ਵੀ ਗੁਣਵੰਤੀ ਹੈ ਜਿਹੜੀ ਗੁਣਾ ਇਹਦੇ ਚ ਗੁਣ ਹੈ ਗੋਣਾ ਵਾਲੀ ਹੈ ਜਿਹੜੀ ਬੁੱਧ ਬੁੱਧੀ ਨਾਲ ਮਹਿਲ ਮਿਲਦਾ ਹੁੰਦਾ ਹੈ ਉਹ ਗਣਵੰਤੀ ਦਾ ਦੂਰੇ ਰਹਿੰਦੀ ਹੈ ਘਰ ਤੋਂ ਉਹ ਤਾਂ ਪਰਦੇਸੇ ਰਹਿੰਦੀ ਹੈ ਮਾਇਆ ਜਿਹਾ ਮਾਇਆ ਪਰਦੇਸ ਹੈ ਉਹ ਸੁਖਸਾਗਰ ਤੇ ਰਹਿੰਦੀ ਹੈ ਤੁਮਸਾਗਰ ਤੇ ਸੁਖਸਾਗਰ ਨਹੀਂ ਜਾ ਸਕਦੀ ਸੁਖਸਾਗਰ ਮਾਇਆ ਦਾ ਹੁਣ ਮਨਤੀ ਨੇ ਮਹਿਲ ਪਾਲਿਆ ਉਹ ਮਹਿਲ ਤੇ ਮਹੱਲਾ ਬਣਦਾ ਫਿਰ ਅੱਲਾ ਪਹਿਲਾ ਮਹੱਲਾ ਦੂਜਾ ਥਾ ਉਸਨੇ ਮਹਿਲ ਨੂੰ ਕਹਾਣੀ ਕਿ ਸੱਚ ਕਲ ਸਿੱਧੀ ਅੱਲਾ ਨਾਲ ਜਗਾਂ ਜਗਾਂ ਲਿਖੀ ਅਨਤ ਤੇਰੇ ਹਰ ਵਸਾ ਤੇਰੇ ਅੰਦਰ ਹਰ ਵਸਾ ਗੁਰਮੁਖੀ ਸਦਾ ਹਜੂਰ ਗੁਰਮਖੰਡੇ ਹਜੂਰ ਨਜ਼ਰਾਂ ਗੁਰਮੁਖਾਂ ਨੂੰ ਦੀਦਾ ਹੁੰਦਾ ਜਿਹਦਾ ਮਤਲਬ ਇਹ ਹੈ ਕਿ ਸੋਪਣੇ ਹੋ ਸਕਦਾ ਜੇ ਗੁਰਮਤਿ ਹੋਵੇ ਗੁਰਮਤਿ ਗੁਰਮੁਖੀ ਗੁਰਮੁਖੀ ਹੋਵੇ ਇਹ ਵੀ ਹਜੂਰ ਨਜ਼ਰ ਹੋਵੇ ਕੋਈ ਕੋਕ ਨਾ ਹੋਵੇਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸ਼ਬਦ ਗੁਰੂ ਕੈ ਕਾਲ ਇਹਨੂੰ ਪੁਕਾਰਨਾ ਹੋਵੇ ਬਾਹੂ ਨੂੰ ਪੁਕਾਰ ਕੀ ਹੈ ਤੋਬਾ ਵੀ ਇਹ ਸਰੀਰ ਕੋਈ ਦੁਖਰੋ ਹੋਵੇ ਜਾਂ ਕੋਈ ਜ਼ੁਲਮ ਵੀ ਆ ਜਿਵੇਂ ਖੋਪਰੀ ਨਾ ਲਾਗੀਆਂ ਤਤੀ ਤਵੀ ਤੇ ਬੈਠੋ ਉੱਥੇ ਹੀ ਹੈ ਤੋਬਾ ਦੀ ਕਰਦੇ ਹੋ ਬੈਠੇ ਨੇ ਅੰਮ੍ਰਿਤ ਕੀ ਉਪਕਾਰ ਕਿਸੇ ਕਿਸਮ ਦੀ ਵੀ ਪਾਣੀ ਦੀ ਉਪਕਾਰ ਕਹਦੀ ਹੈ ਜੀ ਤੇ ਭੰਡਿ ਰਹੇ ਦੱਸਦੇ ਨਾ ਦਾਲ ਨੇ ਹੋਰ ਹੋਰ ਬਿਹੇ ਵੀ ਹੈ ਜਿਹੜਾ ਦੁੱਖ ਨੂੰ ਵੀ ਦਾਰ ਨਹੀਂ ਸੁਣੀ ਜਦੋਂ ਹਾਂ ਜਿਹਾਲ ਹੋਇਆ ਜਦੋਂ ਜਿਹਾਲ ਰਹਿੰਦੇ ਉਹਦੀ ਸੇ ਸਭ ਦੇ ਜੇ ਕੋਈ ਕੁਛ ਵੀ ਨਹੀਂ ਰਹੇ ਸਾ ਭਾਈ ਸੇਖਰ ਜੀ ਕਿਰਪਾ ਨਾਲ ਉਹਨੇ ਹਾਲੇ ਰਹੇ ਦੋ ਜਾਨ ਸੁਨਾਮ ਰੱਖਤੇ ਹੈ ਗੁਰੂ ਸੇਵਕ ਨੇ ਖੁਦ ਨੂੰ ਉਹਦਾ ਵਿਚਰ ਜਾਂਦਾ ਲੋਕ ਦੁਤੇ ਰਾਣੀ ਕਰਤੇ ਜਾਂਦੇ ਨੇ ਉਹ ਕਿਰ ਕੇ ਅਪਲ ਬੂਲ ਨੂੰ ਜੰਦੂ ਜਾਈਏ ਬਲੇ ਤੇ ਜਿਆ ਮਨੇ ਜਗਰਤ ਅਵਸਥਾ ਜੋ ਜਸਨਾ ਦੇ ਜਾਗਦੇ ਦਾ ਸੁਪਨਾ ਹੁੰਦਾ ਇਹ ਜਿਹੜਾ ਜਾਗ ਪੈਂਦਾ ਉਹਦੇ ਬਾਅਦ ਉਹਦਾ ਸੁਪਨਾ ਹਮੇਸ਼ਾ ਲਈ ਬੰਦ ਹੋ ਜਾਂਦਾ ਹੈ ਸੱਚ ਸ਼ਬਦ ਗੁਰੂ ਕਾ ਕਹਲ ਇਹਦਾ ਸ਼ਬਦ ਗੁਰੂ ਆ ਉਹਦੇ ਕਹਲ ਨੂੰ ਬਣਦੇ ਜਿੱਤੇ ਸ਼ਬਦ ਗੁਰੂ ਨਾਲ ਜੁੜ ਜਾਂਦੇ ਨੇ ਤੇ ਨਾਮ ਦਾ ਵਿਚਾਰ ਕਰਦੇ ਨਾਮ ਦਾ ਵਿਚਾਰ ਨਹੀਂ ਕਰਨਾ ਤਾਂ ਇੱਥੇ ਸ਼ਬਦ ਸਿਆਰੀ ਨਾਲ ਆਇਆ ਹੈ ਸ਼ਬਦ ਗੁਰੂ ਕੀ ਅਰਥ ਬਣਨਗੇ ਜੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਕੰਨਾਂ ਘਾੜਦੇ ਠੀਕ ਹੈ ਗੁਰੂ ਦਾ ਸ਼ਬਦ ਹੈ ਜਿਹੜਾ ਹੁਕਮ ਹੈ ਠੀਕ ਹੈ ਗੁਰਬਾਣੀ ਹੋ ਗਈ ਹੈ ਜੀ ਉਹੀ ਗੁਰਬਾਣੀ ਦਾ ਰੱਖਦੇ ਜੀ ਜੀ ਸਰਬੰਲੀ fetta உபਦੇਸ਼ ਕਰਦੇ ਜੀ ਆਸ ਗੁਰਬਾਣੀ ਉਪਦੇਸ਼ ਆਵੇ ਉਹਦੇ ਹਾਂਜੀ ਮਹੱਲਾ ਤੀਜਾ 바 ਵਿਹਾ ਬੇਨਤੀ ਕਰੇ ਕਰ ਕਿਰਪਾ ਦੇਉ ਜੀਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਆ ਬੇਨਤੀ ਕਰਦਾ ਕਰ ਕਿਰਪਾ ਦੇਉ ਜੀਦਾਨ ਮਨ ਤੇ ਕਿਰਪਾ ਕਰੋ ਕਿਰਪਾ ਕਰਕੇ ਮਨ ਨੂੰ ਜੀਵਨ ਦਾਨ ਦਿਓ ਸੱਜ ਜੀਵਨ ਦਿਓ ਇਹ ਜੰਗਲ ਮਾਲ ਨਾਲ ਜਿਹੜਾ ਹੈਗਾ ਇਹ ਤੇ ਛਤਾਰਾ ਹੋ ਜੂਗਾ ਚੱਲ ਰਿਹਾ ਪਿਆਸ ਨਾਲ ਉੱਤਰ ਹੈ ਜਿਹੜਾ ਰੰਗ ਖੁਦ ਕਹਿ ਪੈ ਜਗਾ ਇਹਦੇ ਵਿੱਚ ਨਾ ਪਿਆਸ ਦੀ ਉੱਤਰ ਦੀ ਕਿਸੇ ਚੀਜ਼ ਨਾਲ ਪਿਆਸ ਦੀ ਉੱਤਰ ਪਿਆਸ ਕੀ ਦੀ ਹੈ ਬੰਸਤੀ ਪਿਆਸ ਹੈ ਸ਼ਰੀਰ ਦੀ ਪਿਆਸ ਦੀ ਹੈ ਸ਼ਰੀਰ ਦੀ ਪਿਆਸ ਦੀ ਹੋਰ ਚੀਜ਼ਾਂ ਵਾਂ ਤੇ ਜਿਹੜੀ ਭੁੱਖਾ ਪਿਆਰ ਸਿੱਕੋ ਗਨ ਤੇ ਇਸ ਨੂੰ ਭੁੱਖਾ ਉਤਰੇ ਇਹ ਨਾਲ ਉਤਰਦੀ ਹੈ ਛੁੱਟ ਕੇ ਜਾਣੇ ਮੇਰੇ ਪ੍ਰਾਣ ਮੇਰੇ ਪ੍ਰਾਣ ਛੁੱਟ ਕੇ ਜਾਣਗੇ ਇਹ ਆਵਾਜ਼ ਸਭ ਬੰਦ ਹੋ ਜੂਗਾ ਇਹ ਬੰਦ ਹੋਣ ਤੋਂ ਪਹਿਲਾਂ ਪਹਿਲਾਂ ਮੈਨੂੰ ਸ਼ਬਦ ਗੁਰੂ ਨਾਲ ਜੋੜਨਾ ਹੈ ਤੇ ਸਰੀਰ ਦੀ ਲੋੜ ਹੀ ਰਹਿੰਦੀ ਤੇ ਸਰੀਰ ਤਾਂ ਬੰਦਾ ਭੇਜਿਆ ਹੁੰਦਾ ਰਹਿੰਦਾ ਪਰ ਜਾਗਰਤ ਅਵਸਥਾ ਹੀ ਜਿਉਂਦਾ ਹੈ ਅਤੰਦ ਵਿੱਚ ਜਾਗਰਤੀ ਕਿਉਂ ਹੁੰਦੀ ਸਭ ਜਾਗਣਾ ਸਭ ਜਿਉਣਾ ਇੱਕੋ ਗੱਲ ਠੀਕ ਹੈ ਇਹ ਫਿਰ ਆਰਾਮ ਉਹ ਤਾਂ ਕਹੇ ਜੀ ਜਲਬਿਨ ਪਿਆਸ ਨਾ ਉੱਤਰ ਹੈ ਜੀ ਹਾਂ ਜੀ ਆਰਾਮ ਫਿਰ ਆਰਾਮ ਉਹ ਤਾਂ ਗਿਆਨ ਦਾਈ ਪ੍ਰਤੀ ਗਿਆਨ ਹਰਤੇ ਨਾਮ ਦੀ ਗੱਲ ਕੀਤੀ ਹੈ ਕਵੀ ਨੇ ਰਾਜਾ ਆਰਾਮ ਨਾਮ ਕਬੀਰ ਨਾ ਜੀ ਨਾਮ ਹੈ ਆਰਾਮ ਉਹ ਤੂੰ ਸੁਖ ਬੇਅੰਤ ਹੈ ਗੁਣ ਦਾਤਾ ਨਿਤਾਣ नानक गुरुमुखी बक्ष लए ਬੇਲੀ बेली होए भगवान तू सुख दाता बेअंत है तू सुख दाता है तेरा सब अपना नहीं है बेअंत तू तेरे गुण अलावा अंत नहीं है तेरे किसी भी पक्ष तो तेरा नहीं है गुण दाता वे दान तू गुण दाता है गुणो का खजांद सारे खजांदों ही संभाल के तू चाहे भाय दे ने चाहे श्याम दे ਪੁਰਖਾਂ ਦੇ ਧਾਨ ਧਾਨਤ ਗੁਰਮੁਖੀ ਬਖਸ਼ ਲੈ। ਕੁੱਤ ਦੇਲੀ ਹੋਏ ਭਗਵਾਨ। ਧਾਨੇ ਕਹਿੰਦਾ ਗੁਰਮੁਖ ਨੇ ਜਿਹੜੇ ਉਹ ਬਖਸ਼ ਲੈਣੇ ਉਹ ਬਖਸ਼ੇ ਹੋ ਜਾਂਦੇ ਨੇ। ਜੇ ਗੁਰਮੁਖ ਬਣ ਜੇ ਗੁਰਮੁਖੀ ਵਰਤੀ ਤਾਂ ਜਲਦਾ ਬੁੱਧਾਰ ਤੇ ਅੰਦਰ ਤੇ ਤੇਰੇ ਭਾਂਣ ਚੱਲੇ ਉਹ ਤੇ ਬਖਸ਼ਿਸ਼ ਹੋ ਜਾਂਦੀ ਏ ਤੇਰੀ। ਕੁੱਤ ਦੇਲੀ ਹੋਏ ਭਗਵਾਨ। ਅੱਜ ਦੇ ਤਾਂ ਭਗਵਾਨ ਹੁ ਤਾਂ ਬਣਦਾ। ਉਹਦਾ ਸਾਥੀ ਬਣਦਾ ਹੈ ਉਹਦਾ ਸਹਾਇਕ ਬਣਦਾ ਹੈ ਉਹਦਾ ਫਰਦਦਾਰ ਬਣਦਾ ਹੈ। ਭਗਵਾਨ ਨੇ ਇੱਥੇ ਕਿਹਨੂੰ ਕਿਹਾ ਜੀ ਫਿਰ? ਆਪਣਾ ਮੂਲ ਹੈ ਭਗਵਾਨ ਹੈ। ਤੇ ਨਾਲ ਉਹਨੇ ਹੀ ਸਾਥ ਦੇਣਾ ਹੋਰ ਕਿਹਨੂੰ ਦੇਣਾ। ਅੱਛਾ ਵਾਸਤੇ ਤਾਂ ਦਾ ਸ਼ਬਦ ਦੇ ਰੂਪ 'ਚ ਹੈ। ਠੀਕ ਹੈ ਜੀ। ਬਗਲਾ ਇਹਨੂੰ ਪਰਮਹੰਸ ਨਹੀਂ ਲੈ ਕੇ ਹੋੜਨਾ ਆਪਣੇ ਨਾਲ। ਆਹ ਬਗਲਾ ਰਹੰਸ ਤੇ ਹੋੜਨਾ। ਠੀਕ ਹੈ ਜੀ। ਉਹੜੀ ਆਪੇ ਜਗਤ ਉਪਾਇਕ ਹੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਵ ਜੰਜਾਲ ਹੈ ਨਾਮ ਨਾ ਧਰੇ ਪਿਆਰ ਜਗਤ ਆਪੇ ਪੈਦਾ ਕੀਤਾ ਗੁਣ ਔਗਣ ਕਰੇ ਵਿਚਾਰ ਗੁਣਾ ਔਗਣਾ ਦੀ ਵਿਚਾਰ ਕਰਦਾ ਹਮੇਸ਼ਾ ਨਾਲ ਗੁਣਾ ਔਗਣਾ ਦੀ ਵਿਚਾਰ ਕਰਦੇ ਹੋਰ ਕੁਝ ਨਹੀਂ ਨਾ ਇਹ ਗੁੜਵੰਤਾ ਨੇ ਉਹਨਾਂ ਨੂੰ ਜੀਅ ਜਿੰਨਾ ਜਦ ਕੋਈ ਔਗਣ ਥੋੜਾ ਬਹੁਤਾ ਵੀ ਜਾਂਦਾ ਮੈਂ ਕਿਹਨ ਸਾਧਣ ਚ ਹੈ ਕਹੋਣ ਆਗਣ ਦੀ ਗੱਲ ਐ ਹੋਰ ਕੱਲ ਕੁਝ ਵੀ ਨਹੀਂ ਬਣਾਉਗਣ ਕਰੇ ਵਿਚਾਰ ਐ ਗੋਣ ਸਰਬ ਜਾਲ ਹੈ ਮਾਇਆ ਦੇ ਚੱਕਰ ਗੋਣ ਜਿਹੜੇ ਤੇ ਜਾਲ ਹੈ ਪਰ ਇਹਦੀ ਸਥਿਤੀ ਜਿਹੜੀਆਂ ਕਹਿੰਦੇ ਨੇ ਜਾਲ ਹੈ ਮਾਇਆ ਦੇ ਵਿੱਚ ਰਹੋ ਨਾਮ ਨਾਲ ਸਾਰੇ ਪਿਆਰ ਉਹ ਜਿਹੜੇ ਇਤਨਾ ਗੋਣ ਦੇ ਵਿੱਚ ਜਿਹੜੇ ਗੋਣ ਮਾਇਆ ਚਲੇ ਉਹਨਾਂ ਦਾ ਨਾਮ ਨਾਲ ਸੱਚ ਨਾਲ ਪਿਆਰ ਨਹੀਂ ਸੱਚੀ ਉਹਨਾਂ ਨੂੰ ਭੋਖੇ ਦੀ ਹੁੰਦੀ ਗੁਰੂ ਰਾਇ ਮਾਲ ਜਿੱਦੀ ਪੁਖੋਦੀਏ ਜਿਹੜਾ ਰਾਜ ਮਾਲ ਮੇ ਵੀ ਛੋਰ ਇਸੇ ਦਾ ਛੋਰ ਹੁੰਦਾ ਹਾਂਜੀ ਠੀਕ ਹੈ ਜੀ ਆਪੇ ਜਗਤ ਪਾਇਕ ਹੈ ਇਹ ਵੀ ਇਹ ਪਰਮੇਸ਼ਰ ਵਾਸਤੇ ਆ ਰਿਹਾ ਜੀ ਹਾਂ ਜਗਤ ਉਹਦੀ ਪਹਿਚਾਣ ਹੈ ਠੀਕ ਹੈ ਜੀ ਜੀ ਤਾਂ ਜਗਤ ਦੇ ਠੀਕ ਹੈ ਜਿਹੜਾ ਹੁਣ ਗੁਣ ਔਗਣ ਕਰੇ ਵਿਚਾਰ ਹੈ ਫਿਰ ਧਰਮ ਰਾਏ ਹਰਕਾ ਕੀਆ ਇਸ ਤਰ੍ਹਾਂ ਵੀ ਗੱਲ ਹੈਗੀ ਸਰੇ ਜਿਆਦ ਤੇ ਪਾਈਆਂ ਫੋਟੇ ਸਿੱਧੀਆਂ ਬਾਰ-ਬਾਰ ਇਹ ਵਿਚਾਰ ਕਦੋਂ ਹੁੰਦੀ ਹੈ ਵਿਚਾਰ ਮਰਨ ਤੋਂ ਬਾਅਦ ਹੁੰਦੀ ਹੈ ਕਿ ਹੁਣੇ ਹੋਈ ਜਾਰੀ ਨਾਲ ਦੀ ਨਾਲ ਨਾਲ ਵੀ ਨਾਲ ਵੀ ਹੋਈ ਜਾ ਰਹੀ ਹੈ ਸਾਧਵੇਂ ਇਹ ਹੀ ਹੋਣਾ ਪਾਈਦਾ ਰਹਿੰਦਾ ਆਹ ਤੈਨੂੰ ਵੀ ਪਤਾ ਹੀ ਹੁੰਦਾ ਲੋਕ ਕਹਿੰਦੇ ਤੁਸੀਂ ਝਾਤ ਕੇ ਦੇਖ ਲੈ ਆਪਣੇ ਅੰਦਰ ਹੁੰਦਾ ਸਭ ਨੂੰ ਪਰ ਉਹ ਵਿਚਾਰ ਕੌਣ ਕਰ ਰਿਹਾ ਗੁਣ ਤੇ ਅਗੁਣ ਦੀ ਉਹ ਹਾਰੇ ਕਹਿੰਦਾ ਮਤ ਅਦ ਨੀਲਾ ਦੁੱਧ ਸੱਚਾ ਗੁੰਦਲੇ ਬਸ ਤਾਂ ਨੀਲਾ ਨਹੀਂ ਅੱਬਾ ਮੈਂ ਸੱਚਾ ਚਾਹੇ ਮਨੁਨਦਰੀ ਤੇ ਆਪਾਂ ਜਾਂਦਾ ਫਿਰ ਹੈ ਹਰੇ ਕਿ 프리ਮਤੀ ਤੇ ਰਹਿੰਦਾ ਫਿਰ ਹਰੇ ਜੀ ਕੋਈ ਰਾਮ ਆ ਵੀ 라ਵਣ ਉਹ ਤਾਂ ਜੇ ਔਗਣਾਂ ਦੇਖਣਾ ਤਾਂ 라ਵਣ ਚੌਗਣ ਖੜ ਤੇ ਆਬ ਹੋ ਗਿਆ ਅਸਰ ਕੀ ਫਿਰ ਉਹ ਤਾਂ ਇੱਕੋ ਹੀ ਗੁਣ ਔਗਣਾਂ ਦੀ ਉਹ ਗੱਲ ਹੈ ਦੂਆ ਨੋ ਜਾਂਦਾ ਉਹਦੇ ਨਾਮ ਔਗਣਵਰਤੀ ਆਲਾ ਨੋ ਜਾਂਦਾ ਇਹ ਗੋੜਲੇ ਦਾ ਗੁਣ ਗੁਣ ਤੇ ਆਲਾ ਨੋ ਲੱਗ ਜਾਂਦਾ ਕਿ ਤਾਂ ਇਹਨਾਂ ਤੋਂ ਵੀ ਪਰਮਦੇਵ ਕਹ ਲਾਰੇ ਵੀ ਪ੍ਰਭ ਨੇ ਹੀ ਜਗ ਤੋ ਪਾਇਆ ਆਪਣਾ ਤੇ ਉਹ ਗੁਣ ਆਪੋਨ ਦੀ ਵਿਚਾਰ ਵੀ ਪ੍ਰਭ ਹੀ ਕਰਦਾ ਜਗ ਤੇ ਨਾ ਪੈਦਾ ਕਰ ਸਕਦਾ ਪ੍ਰਭ ਚੰਦ ਸੂਰਜ ਵੀ ਪੈਦਾ ਕਰ ਸਕਦਾ ਆਪਣਾ ਸਰੀਰ ਇਹ ਬਣਾ ਸਕਦਾ ਮਾਇਆ ਜੇ ਰੜ ਸਕਦਾ ਬੜੀ ਬੜਾਈ ਮਾਇਆ ਬਲੂ ਤਾਂ ਹੀ ਲੰਘੂ ਤੇ ਮਾਇਆ ਚ ਤਰੇ ਹੈ ਸਾਰੇ ਹਾਂਜੀ ਮਾਇਆ ਤਰੇ ਮਾਇਆ ਨੇ ਬਿੱਛੇ ਜੋ ਜਿਹੜਾ ਨਾਮ ਨਾਲ ਤੇ ਪਿਆਰ ਹੈ ਮਾਇਆ ਤੋਂ ਤੋੜਨ ਦੀ ਗੱਲ ਹੈ ਜੀ। ਉਹ ਸਾਰੀ ਉਮਤਾ ਮਾਇਆ ਦੇ ਨਾਲੇ ਰਹਿੰਦੀਆਂ ਸੱਡੀਆਂ ਕਰਦੇ ਮਾਇਆ ਦਾ ਕਰਦੇ ਆ ਖੰਡ ਪਾਠ ਮਾਇਆ ਜੀ। ਠੀਕ ਗੱਲੇ ਮਾਇਆ ਦੇ ਖੜੀਆਂ ਕਿੰਨਾ ਗੁਣਾ ਤੇ ਬਾਹਰ ਦੀ ਤਾਂ ਗੱਲ ਹੈ ਆਪਣੇ ਵੀ ਨਹੀਂ ਹੈ ਕੋਈ ਗੁਰਮੁਖ ਪਰਮਾਤਮਾ ਹੋਊਗਾ ਬੱਲੇ ਬੱਲੇ ਹੈਗੇ ਜੀ। ਪਰ ਉਹ ਜੋ ਪਰੇ ਢੀੜ 'ਚ ਸਿਆਣੇ ਨਹੀਂ ਹੁੰਦੇ। ਹਾਂਜੀ ਹਾਂਜੀ ਤੇ ਸਿਆਣਿਆਂ ਦੀ ਢੀੜ ਨਹੀਂ ਹੁੰਦੀ। ਉਹ ਮੇਰਾ ਆਪਾਂ ਨੂੰ ਵੀ ਹੁਣ ਜਦ ਅਰਥ ਕਰਦੇ ਆ ਤਾਂ ਹੁਣ ਬੋਲਣਾ ਪੈਂਦਾ ਨਹੀਂ ਲੋੜ ਕੀ ਸੀ ਬੋਲਣ ਦੀ ਤੇ ਦੇਖਦੇ ਹੀ ਤੁਰੇ ਆਉਂਦੇ ਸਭ ਕੁਝ ਹੁਣ ਤਾਂ ਬਿੜਬੂੜੀ ਔਗਣ ਕਮਾਵ ਦੇ ਦਰਗਾ ਹੋਏ ਖਵਾਰ ਜੁਏ ਜਨਮ ਤਿਨੀ ਹਾਰਿਆ ਕਿਤ ਆਏ ਸੰਸਾਰ ਦੀ ਕਮਾਈ ਦਰਦ ਦਰਗਾ ਹੋਏ ਖੋਰ ਦਰਗਾਹ ਅਧਿਕਾ ਦਰਗਾਹ ਜਿਹੜੀ ਹੈ ਉੱਥੇ ਖਾ ਰੌਣਕ ਦੀ ਗੱਲ ਹੈ ਜਗਾਹ ਜਾਣ ਕੇ ਸਖੌਰੀ ਹੈ ਹਾਂ ਖਾ ਰ ਜੂਏ ਜਦ ਮਿੱਤੀ ਹਾਰਿਆ ਕਿ ਤਾ ਇਸ ਸਾਲ ਜਨਮ ਤੋਂ ਜੂਏ ਖਾਲ ਲਿਆ ਪੁੱਛਿਆ ਜਨਮ ਹਾਰਨਾ ਆਇਆ ਤੇ ਆ ਕੋ ਤੇ ਆਇਆ ਤਾਂ ਲਾਹ ਲੈਣ ਜੀ ਜਨਮ ਹਾਲ ਵੀ ਜੀ ਆਇਆ ਪਰ ਜਦ ਵੱਡਾ ਅਕਲਮੰਦ ਬਣ ਕੇ ਜਦ ਭਗਤ ਜਿਹੜੀ ਗੱਲ ਸੀ ਉਹ ਮੰਦਰੀ ਬਾਤ ਮੰਨਦੀ ਕਿਉਂ ਆਪਣੂ ਪਾਇਆ ਆਪਣਾ ਜਿੱਤਾ ਹੀ ਪਾਉਣਾ ਹੈ نو پر جو اپنے پاؤں چلے ਨੇ. جن وجو یار نہ انہوں نے اور کی کر دو اے درگاہ کتھے دی گل ہو رہی ہے دیو لوک دی گل ہے گل ظمیر چھوڑ دے دا اگے حق سے اکیلا او ہن اکو ہی دیو لوک ہے دیو لوک درگاہ ہی ہو سکتا ہے تیری پیشی ہوندی ہے جڑا আকাশ تا ہے اے دے نال درگاہ دا ہی সম্বন্ধ ہے ਅੱਗੇ ਹੰਸ ਇਕੱਲਾ ਹੰਸ ਦੀ ਪੇਸ਼ੀ ਹੁੰਦੀ ਆ ਜੀ ਉਹ ਹੰਸ ਤੋਂ ਇਨੀ ਉਤਨੀ ਕੈਟਾਗਰੀ ਹੈ ਭਗਤ ਉਹ ਆ ਇੱਕੋ ਹੀ ਹੁੰਦਾ ਹੈ ਓਹੋ ਦੋ ਤਾਂ ਜਦੋਂ ਜਾਇਨੇ ਵਾਇਆ ਜਾਂ ਰਚੇ ਗਰਭ ਤੇ ਜਾ ਕੇ ਦੋ ਹੁੰਦੇ ਨੇ ਤੇ ਇਥੇ ਜਿਹੜੇ ਦੋ ਹੁੰਦੇ ਤੇ ਤਾਂ ਇਕੱਲੇ ਹੀ ਹੈ ਹਾਂ ਉਹ țeੜ ਜਿਹੜੀ ਹੈਗੀ ਹੈ țeੜ ਉਹਦੀ ਸੱਚ ਨਾਲੋਂ ਆਂ ਪਾਤੀ ਖੰਡਲਾਂ ਨੂੰ ਪਈ ਹੋਈ ਆ ਜੀ ਤੇਰੀ ਸੱਚ ਤੇਰੀ ਖੜਾ ਮੱਤ ਭੇਜਦਾ ਤੇੜ ਹੁਰਕੀਆਂ ਮੱਤ ਭੇਜ ਦੂਰ ਹੈ ਸਾਬਤ ਹੈ ਪਰ ਉਥੋਂ ਤੇੜ ਪਈ ਨਾ ਗੁਰਬਾਣੀ ਸੱਚ ਬੋਲਦੀ ਉਹ ਲੜੂ ਤੇ ਕੋਈ ਇਹ ਮੱਤ ਹੈ ਹਾਂ ਸ਼ਬਦ ਮਨ ਮਾਰਿਆ ਅਨਿਸ ਪਿਆਰ ਜਿੰਨੀ ਪੁਰਖੀ ਪੁਰ ਧਾਰਿਆ ਸੱਚਾ ਅਲੱਖ ਅਪਾਰ ਸੱਚਾ ਸ਼ਬਦ ਬੰਨ ਮਾਰਿਆ ਤੇ ਬੰਨ ਵਾਲਾ ਤਾਂ ਆ ਅਰਥ ਉਪਦੇਸ਼ ਸੱਚੇ ਸ਼ਬਦ ਨਾਲ ਸੱਚੇ ਉਪਦੇਸ਼ ਨੂੰ ਬੰਨ ਮਾਰਿਆ ਜਾਊਗਾ ਐਨਸ ਨੂੰ ਪਿਆਰ ਜੁੜ ਜੀ ਲਾਦੀ ਦੀ ਕੋਈ ਬਾਤ ਕੋਈ ਜਿਵੇਂ ਕੋਨ ਮਾਰੂ ਨਾ ਲੈਣਾ ਸਾਡ ਮੰਨ ਗਿਆ ਆਪਣੀ ਭਰ ਦੀ ਛੜਤੀ ਗੁਰ ਤੇ ਪਹਾੜ ਚੜ ਗਿਆ ਅੱਬੇ ਨਾਮ ਨਾਲੇ ਪਿਆਰ ਹੈ ਇਹਦੀ ਪੁਰਖੀ ਔਰਤ ਆ ਰਿਆ ਸੱਚਾ ਅਲਖ ਔਰ ਜਿਹਨਾਂ ਪੁਰਖਾਂ ਨੇ ਫਿਰਦੇ ਵਿੱਚ ਢੋਲ ਨਾਲ ਲੈ ਸੱਚ ਉਹ ਕੌਣ ਨੇ ਉਹ ਪਈ ਅਲਖ ਪੁਰਖ ਅਪਾਰ ਬਾਜ ਉਹਨਾਂ ਦੇ ਅਲਖ ਪੁਰਖ ਅਪਾਰ ਚ ਕੋਈ ਤਾਂ ਇਧ ਰਹੇ ਦੀਆਂ ਤਾਂ ਠੀਕ ਹੈ ਪੁਰਖ ਕਿਹਨੂੰ ਕਹੇ ਜੀ ਫਿਰ ਪੁਰਖੀ ਆ ਪੁਰਖ ਪੂਰਾ ਗੱਲ ਦੇ ਰੱਖਦਾ ਉਹ ਜਿਵੇਂ ਜਿਵੇਂ ਦੇਖਣਾ ਪੈਣਾ ਕੋਈ ਨਾ ਚੁਗੰਦਾ ਫਿਰ ਟੀਚਰ ਟੀਚਰ ਪੁਰਖ ਹੋ ਜਾਂਦਾ ਜਿਹੜੇ ਰੂਹੇ ਦਾ ਕੱਲ ਨਾ ਹੁੰਦਾ ਨਾ ਟੀਚਰ ਪਰਖ ਹੋ ਜਾਂਦਾ ਜਿਹਨੂੰ ਪੂਰਾ ਕੱਲ ਨਾਲ ਧੋੜੀ ਪਰਖਦੇ ਉਹ ਜੀਉਂਦਾ ਉਹ ਬਦੇਸ ਕੱਲ ਵਾਲਾ ਪਰਖੇ ਆ ਰਿਹਾ ਡੇ ਨਰ ਗਰਭ ਕੋਟਨਲ ਜਵਾਜਤ ਜ਼ਰੂਰ ਉਹ ਲਫਜ਼ ਪਰ ਉਹ ਨਾਰਾ ਹੈ ਪਰਖ ਦੀ ਬਰੂ ਨਾਲ ਕਿਹਾ ਨਾਰਾ ਗਰਭ ਕੋਟਨਲ ਵਿੱਚ ਕਿਹਾ ਅੱਛਾ ਕੀ ਫਰਕ ਹੈ ਫਿਰ ਦੋਹਾਂ ਦਾ ਨਰ ਦੋ ਚੋਇਆ ਹੋਇਆ ਪੁਰਖ ਇਕ ਹੋਇਆ ਹੋਇਆ ਨਰ ਤਾਂ ਜੋ ਪੂਰਾ ਹੈ ਦੀ ਸਰਪਗੋੜਨਲ ਸਿਆ ਪੁਰਖ ਗੜਨਲ ਤੋਂ ਬਾਅਦ ਜੇ ਸਰੀਰ ਚ ਵੀ ਹੈ ਤਾਂ ਵੀ ਉਸੇ ਇੱਕ ਹੈ ਦੀ ਭੇਦ ਨਾਲ ਜਾਣ ਨੂੰ ਬੋਲਦੇ ਹਾਂ ਤੇ ਪੁਰਖ ਕੋਈ ਨਰ ਪੁਰਖ ਹੋ ਗਿਆ ਜਾਂ ਭੇਦ ਨਾਲ ਜਾਣਾਂ ਮਾਰ ਤੇ ਹਰ ਕਾ ਸੇਵਕ ਸੋਹ ਹਰ ਜਿਹਾਂ ਭੇਦ ਨਾਲ ਜਾਣਾਂ ਬੋਲਦੇ ਜਾਂ ਫਿਰ ਜਦ ਮਾਇਆ ਵਿੱਚੋਂ ਦਸੀ ਹੋ ਗਿਆ ਫਿਰ ਪੁਰਖ ਉਸ ਅਵਸਥਾ ਜਿਹੜਾ ਗਿਆਨ ਕਰਾਇਆ ਭਗਤਾਂ ਦੇ ਸੇਕ ਜਿਨਿ ਪੁਰਖੀ ਉਲੀ ਧਾਰਿਆ ਸੱਚਾ ਅਲਕ ਅਪਾਰ ਆਪੋ ਬਚੇਲਿ ਪੁਰਖਾ ਪੁਰਖੀ ਆਣਿ ਆਇਆ ਕਿ ਭਗਤਾਂ ਨੂੰ ਹਾਂ ਜੀ ਨਾਨਕ ਭਗਤਾਂ ਸਦਾ ਵਿਗਾਸ ਹਾਂ ਤੂੰ ਗੁਣ ਦਾਤਾ ਹੈ ਅਸੀਂ ਅਵਗਣ ਯਾਰ ਜਿਸ ਬਖਸ਼ੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਤੂੰ ਗੁਣ ਹੈ નિਧਾਨ ਹੈ ਖਜਾਨੇ ਗੋਣਾਂ ਦਾ ਸਾਰੇ ਖਜਾਨਿਆਂ ਦਾ ਅਸੀਂ ਆਉਗਣੇ ਆ ਅਸੀਂ ਓਗਣਾਰੇ ਦੇਖੋ ਇਹ ਓਗਣਾਰੇ ਇਸ ਦੇਹ ਧਾਰੀ ਨੂੰ ਸਰਗੋਣਾ ਮੰਦਰੀ ਕੋਣੋ ਨੀਰ ਗੋਣ ਮੰਦਰੀ ਓਏ ਓਗਣਾਰੇ ਲਿਟਕਣਾਰੇ ਹੁੰਦੇ ਗੁਰ ਜਿਹੜਾ ਹੈ ਗੁਰਮਤ ਹੈ ਲਾਹ ਸਾਰੇ ਗੁਰ ਬੋਲੂਂਦਾ ਸਭ ਗੁਰ ਤੇਰੇ ਨਾਲ ਨਹੀਂ ਪੈਂ ਉਲਟਾ ਹੈ ਉਥੇ ਸਾਖਤਾ ਦੀ ਮਤ ਉਲਟੀ ਹੈ ਸਾਖਤਾ ਨੂੰ ਸਾਡੀ ਮਤ ਉਲਟੀ ਹੈ ਗੁਰਮਤ ਉਲਟੀ ਤੂੰ ਗੁਣ ਦਾਤਾ ਨੇ ਜਾਣ ਹੈ ਅਸੀਂ ਓਗਣ ਯਾਰ ਜਿਸ ਵਕਤਾਂ ਸੇ ਪਾਇਸੀ ਗੁਰਸ਼ਬਦੀ ਵਿਚਾਰ ਗੁਰਸ਼ਬਦ ਵਿਚਾਰ ਸਾਰੇ ਹੀ ਕਰਦੇ ਨੇ ਫਿਰ ਵੀ ਜਦ ਤੇਰੀ ਬਖਸ਼ਿਸ਼ ਹੁੰਦੀ ਹੈ ਨਾ ਤਾਂ ਹੀ ਸਭ ਕੁਝ ਕੁਰਬਾਨੀ ਚ ਸਮਝਿਆ ਬੁਝਿਆ ਜਾ ਸਕਦਾ ਆਪਰੋ ਖਰੀ ਜਿਹੜੀ ਆਪਣੀ ਅਕਲ ਹੈ ਸਾਰੀ ਅਕਲ ਨਾਲ ਗੁਜਣਾ ਸਮਝ ਲੈਣਾ ਮੁਸ਼ਕਲ ਹੈ ਤੇਰੀ ਬੇਰ ਹੁੰਦੀ ਹੈ ਫਿਰ ਹੈ ਤੇਰੀ ਕਿਰਪਾ ਹੁੰਦੀ ਹੈ ਫਿਰ ਸਭ ਕੀਰ ਬੁਝੀ ਜਾ ਸਕਦੀ ਹੈ ਬਾਣੀ ਪਰ ਨਾ ਵਿਦਵਾਨ ਇੱਥੇ ਮਿਹਰ ਤੇਰੀ ਬੁਗਬੇਰੀ ਫਿਰ ਤੋਂ ਹੁੰਦੇ ੜੀ ਹੈ ਕਰਕੇ ਵਿਦਵਾਨੋ ਦੇ ਵਸਤੀ ਗੱਲ ਰਹੇ ਈ ਨਾ ਨਾਮ ਅਕਰਪਾ ਤੁਦੜੀ ਦਾ ਅੰਛੇ ਵਿੱਚ ਠੀਕ ਹੈ ਸ਼ਬਦ ਆਇਆ ਤੂੰ ਗੁਣ ਦਾਤਾ ਨਿਧਾਨ ਹੈ ਅਸੀਂ ਅਫਗਾਨਿਆਰ ਦੀ ਸੋ ਪਾਏ ਸੀ ਗੁਰ ਵਿਚਾਰ ਗੁਰ ਸ਼ਬਦ ਦੀ ਵਿਚਾਰ ਤੋਂ ਬਿਨਾ ਨਹੀਂ ਬਖਸ਼ਿਆ ਜਾ ਸਕਦਾ ਹੈ ਵਿਚਾਰ ਕਰੇ ਤੋਂ ਬਿਨਾ ਬਖਸ਼ਿਸ਼ ਨਹੀਂ ਗੁਰਬਾਣੀ ਦੇ ਵਿਚਾਰ ਹੀ ਆਪਣਾ ਜਿਹੜਾ ਹੈ ਗੁਰਮਤਿ ਦਾ ਟੀਚਾ ਆਬ ਕੁਝ ਵਿਚਾਰ ਦੇ ਵਿੱਚ ਜਿਹੜੇ ਆਪਣੇ ਕੀਰਤਨ ਦਰਬਾਰ ਹੋ ਗਏ ਸਵਾਈਆਂ ਹੋ ਗਿਆਂ ਇਹਨਾਂ ਨੂੰ ਗੁਰਬਾਣੀ ਇੱਥੇ ਫਿਰ ਕਹਿੰਦੀ ਇਸ ਵੀ ਰਹੋ ਹੈ ਜੀ ਗੁਰਬਾਹ ਜਿਹੜੇ ਕੀਰਤਨ ਦਰਬਾਰਾਂ ਵਾਲੇ ਰਹਿਣ ਸਵਾਈਆਂ ਵਾਲੇ ਉਹ ਤਾਂ ਆਈ ਇਸਨਾਤ ਦੀ ਦਿੱਤੀ ਇਹ ਤਾਂ ਉੱਟੇ ਦਾ ਪੌਣ ਹੈ ਜੀ ਹੁਣ ਵੀ ਬਜਿੱਦਲੇ ਹੁਣ ਵੀ ਨਹੀਂ ਆਉਹੋ ਆਪਣੇ ਕੰਮ ਲੱਗੇ ਲੱਗੇ ਰਹਿਣ ਤਾਂ ਕੀ ਫਰਕ ਪੈਂਦਾ ਨੇ ਮਾਣੀ ਕੋਜੀ ਨਹੀਂ ਸਾਰੇ ਠੀਕ ਹੈ ਜਿਹੜੀ ਸਾਰੇ ਠੀਕ ਹੈ ਉਹ ਕਿਹੜਾ ਮੰਦੇ ਸੀ ਤੇ ਉਹ ਨਾਲ ਚੱਲਦੇ ਜਿਹੜੀਆਂ ਦਾ ਪ੍ਰਚਾਰ ਇਹ ਰਿਹਾ ਦਸਮ ਪਾਸ਼ਾ ਤੱਕ ਅੰਮ੍ਰਿਤਸਰ ਬਿਲਕੁਲ ਲਗਾਤਾਰ ਅਜਵੇਂ ਪਾਸ਼ਾ ਜੱਤਾਂ ਛੱਡ ਗਏ ਨੇ ਨਾ ਉਪਰੇ ਸਾਹ ਨੂੰ ਨਾਲ ਜਿਹੜੀ ਇਹ ਜਿਹੜਾ ਇਹਨਾਂ ਦਾ ਭਰਾ ਸੀਗੇ ਉਹਨਾਂ ਦਾ ਗੁਰਮਤਿ ਨੂੰ ਫੜਵਾ ਕੇ ਪ੍ਰਚਾਰ ਚੱਲਦਾ ਰਿਹਾ ਸੀ ਆਖਰ ਤੱਕ ਸੀ ਉਹ ਤਾਂ ਮਾਤਾ ਚੋਤਰੀ ਦੇ ਤੇ ਗਏ ਬੜੀ ਸਿੰਧੂ ਜਨੋ ਇਹ ਛੱਡ ਕੇ ਹੀ ਚਲੇ ਗਏ ਇਹਨਾਂ ਦੇ ਘਰੇ ਫੁੱਟ ਪੈ ਗਈ ਬਿਨਾਂ ਦੇ ਤਨਬੰਦੇ ਬਣ ਕੇ ਫਿਰ ਇਹ ਮੱਲਵੇ ਸੀ ਖੇਤ ਜਾ ਕੇ ਕਿਤੇ ਉਹਨਾਂ ਨੇ ਮਾਤਾ ਨੇ ਗਏ ਉਹ ਤਾਂ ਅੱਪਰ ਸਰੋ ਆਏ ਨੇ ਉਹ ਪੈਦੇ ਜੀ ਉਹ ਸੁਣਨਾ ਹੈ ਉੱਥੇ ਕਲਕੱਤਾ ਸ਼ਬਾਸ਼ਾ ਕੋਲ ਆਇਆ ਸੀ ਹਰਨਪੁਰ ਸਾਹਿਬ ਉਹਨਾਂ ਨੇ ਭੇਜਿਆ ਸੀ ਉਦੋਂ ਧੰਨਵਾਦ ਹਾਂਜੀ ਠੀਕ ਹੈ ਜੀ ਇੱਥੇ 13ਵੀਂ ਪੌੜੀ ਦੀ ਸਮਾਪਤੀ ਹੈ ਜੀ